ਜੇ ਲੋਕ ਮਹੱਲਾ ਤੀਜਾ ਸਤਗੁਰ ਕੀ ਸੇਵਾ ਗਾਖੜੀ ਸਿਰ ਦੀਜੇ ਆਪ ਗਵਾਏ ਸ਼ਬਦ ਮਰੈ ਫਿਰ ਨਾ ਮਰੈ ਤਾਂ ਸੇਵਾ ਪਵੈ ਸੇਵਾ ਗਾਖੜੀ ਸਤਗੁਰ ਨੀ ਸੇਵਾ ਬੜੀ ਮੁਸ਼ਕਲ ਹੈ ਔਖੀ ਹੈ ਵੈਸੇ ਸੌਖੀ ਨਹੀਂ ਹੈ ਗਾਖੜੀ ਗਾਖੜੀ ਔਖੀ ਕਹਿੰਦੇ ਸਰ ਦੀਜੇ ਆਪ ਗਵਾਏ ਅਤੇ ਸਿਰ ਫਤਰਬ ਆਪਣੇ ਹੰਕਾਰ ਦਾ ਤਿਆਗ ਕਰਨਾ ਪੈਂਦਾ ਬਨ ਦੇਣਾ ਪੈਂਦਾ ਹਾਂ ਜੀ ਬਨ ਵਿੱਚ ਸਤਿਗੁਰੂ ਦੇ ਪਾਸ ਬਨ ਦੇਣਾ ਹੀ ਸਿਰ ਦੇਣਾ ਹੋਰ ਕੁਝ ਨਹੀਂ ਹੈ ਪੈਂਦਾ ਉਹਦੇ ਹੁਕਮ ਚ ਚੱਲਣਾ ਪੈਂਦਾ ਪਾਣੀ ਚ ਚੱਲਣਾ ਪੈਂਦਾ ਆਪਣੀ ਮਰਜ਼ੀ ਤਿਆਗਣੀ ਪੈਂਦੀ ਆਪਣੀ ਮਰਜ਼ੀ ਤਿਆਗਣੀ ਸਿਰ ਦੇਣਾ ਆਪਕ ਵਾਹੇ ਆਪਣਾ ਆਪ ਗਵਾ ਦੇਣਾ ਆਪਣਾ ਰੂਪ ਤਿਆਗ ਕਰ ਦੇਣਾ ਆਪਣੀ ਮਰਜ਼ੀ ਦਾ ਤਿਆਗ ਕਰ ਦੇਣਾ ਆਪ ਗਵਾਏ ਜਦੋਂ ਆਪਾਂ ਗਏ ਦਸਮ ਪਾਤਸ਼ਾਹ ਨੇ ਸਿਰ ਦੀ ਮੰਗ ਕੀਤੀ ਸੀ ਉਹਨਾਂ ਨੇ ਮਨ ਇਹੀ ਜਿਆ ਹੋਣਾ ਕਿ ਮਨ ਦਾਓ ਜੀ ਮੈਨੂੰ ਪ੍ਰੈਕਟੀਕਲੀ ਸਿਰ ਲੈ ਲਿਆ ਬਸ ਨੇ ਤਾਂ ਸਮਝ ਲਈ ਸੀ ਗੱਲ ਪਰ ਜਿਹੜੇ ਦੂਸਰੇ ਸੀ ਉਹਨਾਂ ਸੋਚਿਆ ਕਿ ਦੁਆਈ ਸਿਰ ਨਾ ਮੇਰਾ ਲੈ ਲੈਣ ਵਾਓ ਬਸ ਆਹੀ ਗੱਲ ਸੀ ਇਹਦੀ ਗੱਲ ਸੀ ਠੀਕ ਹੈ ਸਿਰ ਦੀਜੇ ਆਪ ਗਵਾਏ ਜਿਨ੍ਹਾਂ ਨੇ ਆਪਾ ਗਵਾ ਲਿਆ ਉਹੀ ਸਿਰ ਦੇਣਗੇ ਹਾਂ ਬਸ ਹੋਈ ਸਿਰ ਦੇਣ शब्द ਮਰੈ फिर ना ਮਰੈ ਤਾਂ ਸੇਵਾ ਪਵੈ ਤਬ ਥਾਂਇ ਜਿਹਨਾਂ ਨੇ ਗੁਰਮਤਿ ਦੇ ਉਪਦੇਸ਼ ਨਾਲ ਆਪਣਾ ਆਪਾ ਗਵਾਤਾ ਆਪਣੀ ਮਰਜ਼ੀ त्याਗ ਪਈ ਫਿਰ ਦੁਬਾਰਾ ਨਹੀਂ ਉਹਦਾ ਮਰਨ ਹੋਣਾ ਬਸ ਇੱਕ ਵਾਰ ਮਰ ਜਿੱਤੇ ਹੋ ਏ ਮਨ ਦੇ ਮਰਨ ਦੀ ਗੱਲ ਪਾਰਸ ਪਰਸੀਐ ਪਾਰਸ ਹੋਵੇ ਸੱਚ ਰਹੇ ਲਿਵ ਲਾਏ ਜਿ세 ਪੂਰਬ ਹੋਵੇ ਲਿਖਿਆ ਤਿਸ ਸਤਗੁਰ ਮਿਲੇ ਪ੍ਰਭ ਆਇ ਹਾ ਪਾਰਸ ਪਰਸੀਐ ਪਾਰਸ ਹੋਵੇ ਦੇਖੋ ਪਾਰਸ ਨਾ ਛਾਰੀ ਬਾਸ ਬਣ ਜਾਂਦਾ ਕਹਿੰਦੇ ਹਾਂਜੀ ਪਰ ਇੱਥੇ ਲੇਖ ਪਰਸ ਨੂੰ ਪਰਸ ਲਈਏ ਤਾਂ ਪਰਸੇ ਬਣ ਜਾਂਦਾ ਗੁਰੂ ਨੂੰ ਸਪਰਸ਼ ਕਰਕੇ ਆਤਮਾ ਮੰਡਲ ਦੇ ਵਿੱਚ ਗੁਰਮੁਖੇ ਪਰਸ ਕੇ ਲੈਣਾ ਨਾਨਕੇ ਬਣ ਜਾਂਦਾ ਉਹ ਪਰਸ ਨੂੰ ਪਰਸ ਕੇ ਪਰਸ ਆਤਮਿਕ ਮੰਡਲ ਦੇ ਵਿੱਚ ਜੇ ਸਪਰਸ਼ ਹੋਇਆ ਦੋ ਆਤਮਾ ਇੱਕ ਹੋ ਗਈ ਇਕਲ ਉਸੇ ਲੈਵਲ ਦੀ ਗੁద్ధి ਉਹਨੇ ਕਹੀ ਉਹਦੇ ਬਦਲੀ ਅੱਗੇ ਹੋਵੇ ਸਾਧ ਕੇ ਰਾਇ ਲੈਵਲ ਆਏ ਸੱਚ ਨਾਲ ਲੱਗਦੀ ਹੈ ਸੱਚ ਨਾਲ ਲੱਗਿਆ ਹੀ ਰਹਿੰਦਾ ਸੱਚ ਨਾਲ ਜਿਸ ਪੂਰੇ ਹੋ ਪੂਰਵ ਹੋਵੇ ਲਿਖਿਆ ਤੇ ਸਤਗੁਰੂ ਮਿਲਿਆ ਕਰੋ ਵਾ ਇਹ ਲਿਖਿਆ ਹੋਇਆ ਸੀ ਪੰਦਰੋਂ ਪਰ ਉਹ ਜੋ ਪ੍ਰੋਸੀਜਰ ਫੀਡ ਆਪ ਦੱਸਿਆ ਉਹ ਕਰਤੀ ਕੋਈ ਜਿਹੜੇ ਕਿਸੇ ਨੇ ਗਲਤ ਦੱਸਿਆ ਸੀ ਉਹਨਾਂ ਪਤਾ ਨਹੀਂ ਸੀ ਇਹ ਗਲਤ ਪ੍ਰੋਸੀਜਰ ਹੈ ਜਾਂ ਗੁਲਾਪ ਹੋਣਾ ਅੰਦਰ ਉਹਨਾਂ ਦੇ ਭਾਵਨ ਸੁਧਰਣ ਵਾਲੇ ਗੱਲ ਹੈ ਯਾਦ ਕੋਲ ਨਾਮ ਕਰੇ ਦਾ ਤਾਂ ਇਹ ਪ੍ਰੋਸੀਜਰ ਗਲਤ ਹੈ ਆ ਪ੍ਰੋਸੀਜਰ ਪ੍ਰਾਪਤੀ ਗਿਆ ਫਾਰਮੂਲਾ ਠੀਕ ਲੱਗ ਗਿਆ ਗੁੱਡ ਹੀਟ ਮਿਲ ਗਿਆ ਕੋਈ ਆਪਾਂ ਨੂੰ ਤਾਂ ਅੱਗੇ ਪਤਾ ਹੀ ਹੈ ਤੁਸੀਂ ਅੱਗੇ ਸਾਰਾ ਕੋਲ ਮੈਚ ਕਰਕੇ ਦੇਖਿਆ ਹੋਇਆ ਹਾਂ ਨਾਨਕ ਗਨਤਾ ਸੇਵਕ ਨਾ ਮਿਲੈ ਜਿਸ ਬਖਸ਼ੇ ਸੋ ਪਵੈ ਥਾਏ ਨਾਨਕਾ ਨੇ ਸੇਵਕ ਨਾ ਮਿਲੈ ਜਿਹੜੇ ਗਿਣਤੀ ਕਰਦੇ ਨੇ ਨਾ ਜੋ ਤੁਸੀਂ ਵੀ ਦੀ ਗਿਣਤੀ ਕਰਦੇ ਨੇ ਬਣਕੇ ਦੀ ਗਿਣਤੀ ਐ 27 ਬਣਕੇ 108 ਬਣਕੇ ਇਹ ਨਹੀਂ ਪ੍ਰਾਪਤ ਹੁੰਦਾ ਇਹ ਨਾਲ ਇਹਦਾ ਕੋਈ ਪ੍ਰਾਪਤੀ ਹੁੰਦੀ ਸੇਵਕ ਨਾਮ ਲੈ ਜਿਸ ਬਖਸ਼ੇ ਸੋ ਪਵੈ ਥਾਏ ਇਹਦਾ ਬਖਸ਼ਿਸ਼ ਹੈ ਗਿਰਤੀ ਬਿਰਤੀ ਰਦੀ ਬਿਰਤੀ ਰਦਾਈਂ ਵਾਲਾ ਫੈਰਤੀ ਉਹ ਇਨੇ ਨੋ ਮੇਂ ਜਪਰੇ ਨਾ ਹੋ ਕਰਦੇ ਠੀਕ ਹੈ ਜੀ ਮਹੱਲਾ ਤੀਜਾ ਮਹਿਲ ਕੁਮਹਿਲ ਨਾ ਜਾਣਨੀ ਮੂਰਖ ਆਪਣੇ ਸਵਾਏ ਸ਼ਬਦ ਚੀਨੇ ਤਾਂ ਮਹਿਲ ਲਹੈ ਜੋਤੀ ਮਹਿਲ ਤੇ ਕੁਮਹਿਲ ਦਾ ਨਹੀਂ ਪਤਾ ਮਹਿਲ ਕੀ ਹੈ ਜਿਹੜੇ ਬਾਹਰ ਮਹਿਲ ਬਣਾ ਨਹੀਂ ਫਿਰਦੇ ਨੇ ਨਾ ਪੱਥਰ ਦੇ ਰਾਜੇ ਇੱਕ ਮਹਿਲ ਨੇ ਮਹਿਲ ਨਹੀਂ ਹੁੰਦਾ ਮਹਿਲ ਅੰਦਰ ਹੁੰਦਾ ਮਹਿਲ ਤਾਂ ਹਿਲਦਾ ਹੈ ਇਹ ਬਾਹਰ ਜਿਹੜੇ ਮਹਿਲ ਬਣਾ ਲਏ ਨੇ ਇਹ ਮਹਿਲ ਕੁਮਹਿਲ ਨੇ ਇਹ ਮਹਿਲ ਸੁਬਦਦੀ ਉਪਜਾ ਉਹ ਬੇਕੁਦਦੀ ਉਪਜਾਏ ਉਹ ਬੇਕੁਦਦੀ ਦਾ ਕੀ ਹੁੰਦਾ ਉਹ ਕੁਬਦ ਨੇ ਦਾ ਸੇਰਹਲ ਕੀ ਹੁੰਦਾ ਉਹ ਕੁਮਹਿਲ ਨੂੰ ਮਹਿਲ ਕਹਿੰਦਾ ਮਹਿਲ ਕੋ ਬਣਾ ਲਾ ਜਨਣੀ ਗੁਰੂ ਕੋ ਆਪਣੇ ਸਵਾਏ ਗੁਰੂ ਨੇ ਪੰਡਤ ਮੂਰਖਾ ਆਪਣੇ ਸਵਾਏ ਉਹ ਰਾਜੇ ਨੂੰ ਕਹਿਤਾ ਮੈਂ ਲਾ ਰਹਿਂਦਾ ਜੀ ਰਾਜਾ ਆਪਣੇ ਸਵਾਏ ਆਪਣੇ ਸਵਾਰਥ ਵਾਸਤੇ ਮਹਿਲ ਕੁਮੈਲ ਦਾ ਫਰਕ ਮਿਟਾ ਦਿੱਤਾ ਪੰਡਤ ਨੇ ਵਿਦਵਾਨ ਨੇ ਸ਼ਬਦ ਚੀਨ ਮਹਿਲ ਲਹੇ ਜੋਤੀ ਜੋਦ ਸਮਾਏ ਉਹ ਸ਼ਬਦ ਨੂੰ ਖੋਜੋ ਉਪਦੇਸ਼ ਨੂੰ ਚੀਨੋ ਫਿਰ ਮਹਿਲ ਦਾ ਪਤਾ ਲੱਗੂ ਕੀ ਐ ਫਿਰ ਮਹਿਲ ਦੇ ਅਰਥਾਂ ਦਾ ਪਤਾ ਲੱਗੂ ਕੀ ਐ ਬਾਹਰ ਮਹਿਲ ਬਣਾ ਲੈ ਤੁਸੀਂ ਕਿਤੇ ਪੱਥਰ ਲਾ ਲੈ ਮਹਿਲ ਬਣ ਗਏ ਤੁਹਾਡੇ ਜੀਤੇ ਲਾ ਕੇ ਮਹਿਲ ਜੋਤੀ ਜੋਤ ਸਮਾਇਂ ਜੋਤੀ ਜੋਤ ਸਮਾਇਂ ਜੋਤੀ ਜੋਤ ਇੱਕ ਹੋ ਜਵੇ ਤਾਂ ਮਹਿਲ ਬਣਦਾ ਹੈ ਇਹਦਾ ਜਦ ਜਦਇਕ ਤਾਂ ਹੋ ਜਾਣਗੇ ਤਾਂ ਮਹਿਲ ਬਣਦਾ ਨਹੀਂ ਮਹਿਲ ਨਹੀਂ ਬਣਦਾ ਕੁੜੀ ਦਾ ਛੜਦਾ ਕੁਝ ਛੜ ਦਿੰਦਾ ਯਾਦਾ ਕਰ ਕੋਈ ਚੋਕ ਤਾਂ ਦਸਵਾਂ ਦਵਾਰ ਖੁੱਲ੍ਹੇ ਤੇ ਦਸਵਾਂ ਦਵਾਰ ਉਹ ਮਹਿਲ ਜੋਤੀ ਭਾਵ ਹੈਗਾ ਚਿੱਤ ਤੇ ਜੋਤ ਦਾ ਭਾਵ ਹੈਗਾ ਮਨ ਮਨ ਨੇ ਚਿੱਤ ਚ ਸਮਾਉਣਾ ਹੈ ਜੀ ਇੱਕੋ ਜੋਤ ਹੋਗੀ ਦੋਹਾਂ ਦੀ ਹੀ ਰਹੇਗੀ ਆ ਜੀ ਬਸ ਸਮਾ ਗਈ ਉਹਦੇ ਸਦਾ ਸੱਚੇ ਕਾ ਭਉ ਮਨ ਵਸੈ ਤਾਂ ਸਭਾ ਸੋਜੀ ਪਾਈ ਸਦਾ ਸੱਚੇ ਦਾ ਭੌ ਵਸ ਜਦੋਂ ਸਦਾ ਹੀ ਸੱਚੇ ਦਾ ਭੌ ਹਿਰਦੇ ਵਿੱਚ ਬਣਿਆ ਰਹੂ। ਪ੍ਰੇਮ ਬਣਿਆ ਰਹੂ। ਧਰ ਬਣਿਆ ਰਹੂ। ਮਨ ਵਸਾ। ਸਦਾ ਸੱਚੇ ਦਾ ਭੌ ਮਨ ਵਸਾ। ਹਾਂਜੀ। ਤਾਂ ਸਭ ਪਾਏ। ਸਦਾ ਸੱਚੇ ਦਾ ਪਾਏ। ਦਰ ਬੱਕੇ ਢਲ ਰਹੇ ਤਾਂ ਵਿੱਚ ਰਹੇ ਹੁਕਮ ਵਿੱਚ ਰਹੇ ਤਾਂ ਸਾਰੀ ਉਹ ਸੋਝੀ ਪੈ ਜਾਂਦੀ ਹੈ। ਸਾਰੀ ਉਹ ਸੋਝੀ ਆ ਜਾਂਦੀ ਹੈ। ਸਤਗੁਰ ਆਪਣੇ ਘਰ ਵਰਤਦਾ ਆਪੇ ਲੈ ਮਿਲਾਏ ਨਾਨਕ ਸਤਗੁਰ ਮਿਲਿਆਂ ਸਭ ਪੂਰੀ ਪਈ ਜਿਸ ਨੂੰ ਕਿਰਪਾ ਕਰੇ ਰਜ਼ਾਈ ਸਤਗੁਰ ਆਪਣੇ ਘਰ ਵਰਤਦਾ ਆਪੇ ਲੈ ਮਿਲਾਏ ਜੇ ਉਹ ਜਿਆਦਾ ਪੜਨਾ ਨਾਗੇ ਸਤਗੁਰੂ ਤੇਰੇ ਕੋਲ ਹੁੰਦਾ ਪਾਉਂ। ਉਹ ਤਾਂ ਆਪਣੇ ਕਰੇ ਵਰਤੂਗਾ ਰਹੂਗਾ ਹੋਣੀ ਆਉਂਦਾ ਤੇਰੇ ਤੋਂ। ਜੇ ਲਾ ਜਾ ਉਹ ਤੇ ਹੈ। ਨਾ ਸਤਗੁਰੂ ਨਾਲ ਜੁੜਨਾ ਸਾਡੀ ਜੋ ਹੈ ਉਹਦੀ ਲੋੜ ਨਹੀਂ ਹੈ। ਪਰ ਸਾਨੂੰ ਮੈਂ ਤੇਰੇ ਤੇ ਸਾਡਾ ਘਰ ਟੈਣਾ ਉਹਦਾ ਵੀ ਹੈਗਾ ਉਹਦਾ ਮਹਿਲ ਹੈ। ਠੀਕ ਹੈ ਨਾਨਕ ਸਤਗੁਰੂ ਮਿਲੀਆਂ ਸਭ ਪੂਰੀ ਪਈ। ਨੋ ਕਿਰਪਾ ਕਰੇ ਰਜ਼ਾਈ ਜਾਨੇ ਕਹਿੰਦਾ ਸਤਗੁਰ ਬਿੱਲੀ ਆ ਜਾਂ ਸਤਗੁਰ ਦੇ ਨਾਲ ਮਿਲ ਜਾਈਏ ਫਿਰ ਪੂਰੀ ਪਈ ਬਸ ਸਾਰੀ ਖੜ ਪੂਰੀ ਹੋ ਗਈ ਫਿਰ ਜਿਸ ਨੂੰ ਕਰਪਾ ਕਰੇ ਰਜਾਏ ਪਰਮੇਸ਼ਰ ਰਜਾ ਕਰਪਾ ਕਰੇ ਉਹਦੀ ਪੂਰੀ ਹੋ ਹੈ ਉਹ ਜਿਹੜਾ ਰਜਾ ਦਾ ਮਾਲਕ ਹੈ ਹਾਕਮ ਹੁਕਮ ਦਾ ਮਾਲਕ ਉਹ ਰਜਾ ਪਰਮੇਸ਼ਰ ਹੋ ਗਿਆ ਹਾਂਜੀ ਹਾਂਜੀ ਔੜੀ ਤਨ ਤਨ ਭਾਗ ਤਿਨਾ ਭਗਤ ਜਨਾ ਜੋ ਹਰ ਨਾਮਾ ਹਰ ਮੁਖ ਕਹਤਿਆ ਤਨ ਤਨ ਸੰਤ ਜਨਾ ਜੋ ਹਰ ਜਸ ਸ੍ਰਵਣੀ ਸੁਣਿ ਸਰਵਣੀ ਉਹ ਭਗਤ ਜਨੋ ਉਹ ਭਗਤ ਜਨਾ ਦੇ ਤਨ ਤਨ ਨੇ ਜੋ ਹਰ ਹਰ ਮੁਖ ਕਹਤੈ ਜਿਹੜੇ ਹਰ ਨਾਮ ਦਾ ਜਾਪਨ ਕਰਦੇ ਨੇ ਹਰ ਮੁਖ ਨਾਲ ਹਰ ਅਸਮਾਨ ਨਾਲ ਜਿੰਨਾ ਆਤਮਾ ਦੇ ਮੁਖ ਨਾਲੇ ਚਾਰ ਨਿਗਰਦੇ ਨੇ ਤਾਂ ਸੰਤਾਂ ਨੂੰ ਆਵਤਨਾ ਸੰਤਜਨ ਜੋ ਸੁਣਦੇ ਆ ਉਹ ਜਿਹੜਾ ਭਗਤ ਜਿਨ੍ਹਾਂ ਨੇ ਉਚਾਰਨ ਕੀਤਾ ਆ ਉਹ ਹਰ ਜਾਸਾ ਆ ਜਿਹੜਾ ਗੁਰਬਾਣੀ ਉਹ ਜਿਹੜੇ ਸੰਤ ਜਨ ਨੇ ਜਿਹੜੇ ਇਹਨੂੰ ਸੁਣ ਲੈਂਦੇ ਨੇ ਉਹਨਾਂ ਦੇ ਤੁਣ ਭਾਗ ਹੋ ਜਾਂਦੇ ਨੇ ਭਗਤਾਂ ਨੇ ਉਚਾਰਨ ਕੀਤੀ ਆ ਬਾਣੀ ਸੰਤ ਜਨਾਂ ਨੇ ਸੁਣਨੀ ਆ ਇਹ ਸੁਣਨੀ ਜਿਹੜੇ ਸੁਣ ਲੈਣਗੇ ਉਹਨਾਂ ਦੇ ਤੱਜ ਭਾਗ ਹੋ ਜਾਣਗੇ ਜਿਹੜੇ ਨਹੀਂ ਸੁਣਦੇ ਨਾ ਸਹੀ ਬੁੱਧੀ ਨਾਲ ਸੁਣਨੀ ਹੈ ਜੀ ਸਰਵਣੀ ਨਾਲ ਸੁਣਨੀ ਹੈ ਹਰ ਸਰਬੰਦ ਸਾਧ ਜਨਾ ਹਰ ਕੀਰਤਨ ਗਾਏ ਗੁਣੀ ਜਨ ਬਣਤਿਆਂ ਹੁਣ ਸਾਧ ਜਨ ਲੈ ਲੈ ਜੀ ਨੰਬਰ ਤੇ ਸੰਤਾਂ ਦੇ ਭਾਗ ਤਨਾ ਸਾਧ ਜਨ ਹਰ ਕੀਰਤਨ ਗਾਏ ਗੁਣੀ ਜਨ ਬਣਤਿਆਂ ਜਿਹੜੇ ਆ ਗੁਰਬਾਣੀ ਦਾ ਕੀਰਤਨ ਕਰਕੇ ਗੁਣੀ ਜਨ ਬਣ ਜਾਣਗੇ ਇਹ ਗੁਣ ਧਾਰਨ ਕਰਨਗੇ ਇਹੀ ਗੋੜ ਜਿਹੜੇ ਕਰ ਲੈਣਗੇ ਇਹ ਗੁਣ ਸਾਰੇ ਗੁਣ ਗਾਇਨ ਗੁਣ ਧਾਰਨ ਕਰ ਲਗੇ ਤਾਂ ਤਦ ਭਗਵਾਨ ਬਣਨਗੇ ਜੇ ਗੁਣ ਧਾਰਨ ਨਹੀਂ ਕਰ ਲਗੇ ਮੈਲ ਨਾਲ ਗੁਣੀ ਨਹੀਂ ਬਣਨ ਕੀਰਤਨ ਕਰਦੇ ਨੇ ਰਾਗੀ ਗੁਣ ਗਾਇਨ ਕਰਦੇ ਨੇ ਪਰ ਇਹ ਗੁਣ ਧਾਰਨ ਨਹੀਂ ਕਰਦੇ ਇਸ ਸਰਚਰ ਦੀ ਪ੍ਰਾਪਤੀ ਕਿੱਥੀ ਹੈ ਮਾਇਆ ਕਰਕੇ ਕਹਉਂਦੇ ਨੇ ਪੁਰਝਾਨ ਬਣਦੇ ਹਾਂਜੀ ਤਨ ਤਨ ਭਾਗ ਤਨਾ ਗੁਰਮੁਖਾਂ ਜੋ ਗੁਰ ਸਿੱਖ ਲੈ ਮਨ ਜਿੰਤਿਆਂ ਤਨ ਤਨ ਭਾਗ ਤਨ ਗੁਰਮਖਾਂ ਹੁਣ ਗੁਰਮਖਾਂ ਦੇ ਅੱਗੇ ਤੀਜੀ ਗੁਰ ਸਿੱਖ ਦੇਖੋ ਸਿੱਖ ਅਭੂ ਸਿੱਖ ਆਏ تھے ਜਿਹਨੇ ਤੋਂ ਆਪਣਾ ਤੋਂ ਸਿੱਖਿਆ ਲੈ ਕੇ ਆਪਣਾ ਮਨ ਜਿੱਤਦੇ ਨੇ ਆਪਣੇ ਮਨ ਨੂੰ ਮਨਉਂਦੇ ਇਹਦੇ ਗੁਰਬਾਣੀ ਦੀ ਗੱਲ ਮੰਨਣੀ ਹੈ ਸਤਗੁਰ ਦੇ ਪਿੱਛੇ ਲੱਗਣਾ। ਨੇ ਤੇ ਕਿਆ ਲੈ ਕੇ ਗੁਰਬਾਣੀ ਦੀ ਉਹਨਾਂ ਦੇ ਤੁਨ ਭਾਗ ਹੋ ਜਾਂਦੇ ਨੇ ਗੁਰਮ ਹੋ ਜਾਂਦੇ ਨੇ। ਸਭ ਤੋਂ ਵੱਡੇ ਭਾਗ ਗੁਰਸਿੱਖਾਂ ਜੋ ਗੁਰਚਰਣੀ ਸਿੱਖ ਪੜਤਿਆਂ। ਹੋਰ ਕਿਹ ਕਹਦੇ ਸਭ ਵੱਡੇ ਭਾਗ ਨੇ। ਇਹਨਾਂ ਨੂੰ ਸਤਿਗੁਰੂ ਕੋਲ ਮਿਲਿਆ ਹੋਇਆ, ਪਿਊਟਰ ਮਿਲਿਆ ਹੋਇਆ, ਸਿੱਖਿਆ ਦੇਣ ਵਾਲਾ ਸਤਿਗੁਰੂ ਮਿਲਿਆ ਹੋਇਆ। ਰੋਜ਼ ਉਹਨਾਂ ਨੂੰ ਪੜਾਉਂਦਾ ਹੈ। ਉਹ ਸਿੱਖਾਂ ਦੇ ਸਭ ਤੋਂ ਵੱਡੇ ਭਾਵ ਉਹਨੇ ਜਿਹੜੇ ਚੜ੍ਹ ਲਈ ਲੱਗੇ, ਗੁਰੂ ਦੀ ਸਿੱਖਿਆ ਪੜ੍ਹ ਰਹੇ ਨੇ ਰੋਜ਼। ਉਹਨਾਂ ਨੂੰ ਬੜਾ ਸੌਖਾ ਹੈ। ਪੜ੍ਹਾਈ ਕਰਾ ਰਹੇ ਦੂਜਾ ਕੋਈ ਉਹਨਾਂ ਦੀ ਮਦਦ ਹੈ, ਉਹਨਾਂ ਦੇ ਵੱਡੇ ਪਤਨ ਨੇ ਸਭ ਤੋਂ। ਉਹਨਾਂ ਦੀ ਮਦਦ ਕਰਨ ਵਾਲਾ ਬਾਹ ਫੜੀ ਖੜਾ ਹੈ ਦੀ। ਇੱਕ ਨੇ ਆਪ ਨਾ ਦੀ ਗੱਲ ਨਹੀਂ ਆ ਕਾਰ ਕਰਦੇ ਆ ਇੱਕ ਦਮ ਕਿਸੇ ਦੇ ਬਾਹਰ ਕੇ ਪਾਰ ਦੇ ਭਾਗ ਸਭ ਤੋਂ ਵੱਡੇ ਆ ਜੀ ਜੋ ਗੁਰ ਚਰਣੀ ਸਿੱਖ ਆ ਕਿ ਉਹ ਪੜ੍ਹ ਕੇ ਗੁਰ ਚਰਨਾਂ ਨਾਲ ਸਿੱਖਿਆ ਲੈ ਰਹੇ ਜੀ ਰੋਜ਼ ਪੜਾਈ ਹੋ ਰਹੀ ਆ ਦੀ ਗੁਰ ਚਰਣੀ ਲੱਗੇ ਰੋਜ਼ ਰਾਹ ਲੈ ਰਹੇ ਨੇ ਇੱਥੇ 18ਵੀਂ ਸਮਾਪਤੀ ਹੈ ਜੀ